ਆਵਾਜ਼ੀ ਤਾਣੂ ਹੂਏ ਕਿਸੇ ਤਾਣੂ ਜਿਦਣ ਪਰਖਣ ਕੀਤਾ ਗੁਰੂ ਸਾਹਿਬ ਦੀ ਤਾਂ ਹੁਕਮ ਦਾ ਕਹਿੰਦੇ ਕਹਿ ਨਹੀਂ ਸਕੀ ਦਾ ਇਹ ਵਿਤਾਰ ਨਹੀਂ ਕਿਹਾ ਕਿ ਮਹਾਰਾਜ ਉਹਦੇ ਕੌਣ ਬੰਦੇ ਤਾਂ ਹੀ ਕੰਮ ਕਰਦੇ ਉਹਨਾਂ ਨੇ ਕਹਿ ਹੀ ਗੁਰੂ ਸਾਹਿਬ ਬਲ ਦੇ ਸਿੰਘ ਪਤਾ ਲੱਗੀ ਵੀ ਕਿ ਇਹਨਾਂ ਕਹਾਦਵਾਰੀ ਦੀ ਬਲ ਹੋਵੇ ਪਤਾ ਲੱਗਿਆ ਅੰਦਾਜ਼ਾ ਕਿ ਇਹਨਾਂ ਬਲੀ ਹੈ ਯੂ ਪਰਮੇਸ਼ਰ ਦਾ ਆਜਾ ਆ ਜਾਏਗਾ ਗੁਰੂ ਸਾਹਿਬ ਦੀ ਮੁਖੇਦੀ ਪੱਖ ਦੁਆਰਾ ਕਹੀ ਜਾਂਦੀ ਤਾਨ ਇਸ ਗੋਪੀ ਸੁਸ੍ਰੀਸ਼ੇ ਦੇ ਤਾਨ ਬੰਨ ਨਹੀਂ ਕਹਾਂਗਾ ਸਕਦਾ ਹਰਮ ਭਰਨ ਜਾਂ ਤਾਂ ਮੇਕਰ ਹੋਰ ਉਸ ਮੰਤਰ ਨਾ ਜਾਣੇ ਹੋਰ ਜਿਹੜਾ ਅਖਰੇ ਖੋਲ ਨੂੰ ਇੱਕ ਵੀਕਲ ਵਿੱਚ ਸ੍ਰਿਸ਼ਟੀ ਨੂੰ ਆਪਲੇਂਦਾ ਤੇ ਪਾਲਣ ਕਰ ਲੈਂਦਾ ਦੇ ਦੇ ਵੱਡੇ ਬਾਲੀ ਪਰਮੇਸ਼ਰ ਵੀ ਕਹੋਂਗਾ ਸਕਦਾ ਹੈ ਕਿਸੇ ਵੀ ਗਾਉਂ ਦੀ ਸਮਰੱਥ ਨਹੀਂ ਹੈ ਹੋਵੇ ਕਿਸੇ ਤਾਣੂ ਤੇ ਕਿਸੇ ਦੀ ਪਰਮੇਸ਼ਰ ਜਿਹੜਾ ਬਲ ਹੋਵੇ ਤਾਂ ਤਾਂ ਕੋਈ ਗਾ ਸਕੇ ਕਿਉਂ ਪਰਮੇਸ਼ਰ ਕਿਸੇ ਦੀ ਬਾਲੀ ਨਹੀਂ ਇਹਦੇ ਬਲ ਨੂੰ ਕੌਣ ਜਾਣ ਸਕਦਾ ਹੈ ਗਾਵੇ ਗਾਵੇ ਤਾਣੇ ਨੀਸਾੜੇ ਕਿਹਾ ਜਾਵੇ ਦਾਤਾ ਹੀ ਰਹੇ ਹੋ ਸਾਰੇ ਜਿਹੜੇ ਸੁਬਹ ਪਰਮੇਸ਼ਰ ਦੀਆਂ ਦਿੱਤੀਆਂ ਬਾਤਾਂ ਇਹ ਕਿ ਆਦਮੀ ਕੋਈ ਦੁਨੀਆ ਨਹੀਂ ਜਾ ਸਕਦੀ ਆ ਕਹੋ ਨਾ ਬੁਰਖੀਆ ਉਸ ਪਰਮੇਸ਼ਰ ਦੀਆਂ ਦਿੱਤੀਆਂ ਬਾਤਾਂ ਨੂੰ ਗਾ ਕਰਕੇ ਕੋਈ ਵੀ ਜਾਣ ਸਕਦਾ ਜਨ ਹੈ ਬਾਪ ਗਾਵੇ ਤੀ ਓਲ ਬਦਿਆਨਾਰ ਸਾਰੇ ਜਿੰਨੇ ਜੀ ਜਾਣਦੇ ਹੋ ਤੇ ਉਹਨੀਆਂ ਨਿਕਾਨੀਆਂ ਦੱਸ ਕੇ ਸਾਰੇ ਕੋਲ ਬੜੇ ਅੰਨਿਆ ਕਿਆ ਜੋ ਹੋਰ ਹੈ ਉਹਨੇ ਬਾਪਾ ਨਹੀਂ ਕਹੀ ਜਾਨੀਆਂ ਗੁਮੀ ਦੱਸ ਦਿਓ ਦੇ ਗੁਨਾ ਨੂੰ ਕੌਣ ਦਵਾ ਸਕਦਾ ਹੈ ਜੋ ਸਿੱਧੇ ਪਾਰਸਾ ਦੇ ਦੋਨੋਂ ਪਾਰਸਾ ਦੇ ਕਰਨ ਪਾਉਣ ਨੂੰ ਭਾਵੇਂ ਵਿਖੇਲੇ ਦੀਂਦਿਆ ਆਲਾ ਇਹਨੇ ਦੇ ਨੂੰ ਕੌਣ ਜਾਣੇ ਸਿਰਫ ਕੋਈ ਵੀ ਨਹੀਂ ਜਾਣ ਸਕਦਾ ਅਦੇ ਉਹ ਜਿਹੜੀਆਂ ਵਿਡਿਆਈਆਂ ਦਿੱਤੀਆਂ ਹੋਈਆਂ ਚਾਰ ਨਵੇਂ ਸੁੰਦਰ ਜਿਹਾ ਹੈ ਕੁੱਝ ਪਾਠ ਕਰਦੇ ਆ ਉਹ ਵਿਡਿਆਈ ਆਕਾਰ ਵਿਡਿਆਈਆਂ ਤੇ ਆਕਾਰ ਤਕਬਾ ਨੂੰ ਉਹਦੇ ਨੂੰ ਕੌਣ ਜਾਣ ਸਕਦਾ ਹੈ ਪਰ ਪਾਠ ਸੰਪਰਵਾਹ ਸੁੰਦਰ ਜਿਹਾ ਜਿੰਦੂ ਬੜੀ ਆਈਏ ਕੌਣ ਦਾਸ ਜਿਦਿਆ ਜਿੰਦੂ ਸਭ ਨੂੰ ਕਹਿੰਦੇ ਆਚਾਰ ਵੀ ਬਣਾਉਣਾ ਹੋਵੇ ਤਾਂ ਆਚਾਰ ਆਣੇਗੇ ਕਿੰਨੇ ਤੋਂ ਆਚਾਰ ਸ਼ਬਦ ਕੇ ਗਿਆਨ ਦੇ ਤਰੀਕੇ ਨਾਲ ਨਿਕਲੇਗਾ ਬਾਹਰ ਬੜੀ ਆਈਏ ਆਚਾਰ ਨਹੀਂ ਕਰਨੀ ਸੀ ਉਹਨੇ ਜਿਦਿਆ ਆਚਾਰ ਹੀ ਕਰਨਾ ਉੰਨੇ ਕਰਵਾਈਏ ਪਾਰਨੀ ਤੇ ਉਹ ਕਹਿੰਦੇ ਕਾਹਦੀ ਇਨਸਾ ਦਾ ਪਾਪ ਹੈ ਇਹ ਕਿ ਨਹੀਂ ਕਾਹਦੇ ਨਾ ਹੋਵੇ ਉਹ ਬਾਲਾ ਕੋ ਜਿੰਦੂ ਬੜੀ ਆਈਏ ਚਾਰ ਉਸ ਗੁਰੂ ਦੇ ਲਈ ਸੁੰਦਰ ਬਿੜਾਈਆਂ ਨੂੰ ਗਾਉਣੇ ਤੇ ਭਾਈ ਕਾਉਂ ਦਾ ਸੱਜਣਾ ਕਾਉਂ ਦੇ ਇਹੋ ਕਿਸਮਰਖਾ ਨਹੀਂ ਗਾਉਣ ਦੀ ਹੈ। ਸਾਰੇ ਤੂੜੀਆ ਵਿਖੇ ਮੁਰਗੀ ਚਾਰ ਤੇ ਮਾਰੇ ਉਸ ਤੋਂ ਨਹੀਂ ਕਿੰਨੀ ਨੂੰ ਕੌਣ ਜਾਣ ਸਕਦਾ ਸਕਦਾ। ਉਸ ਬਿੜੀਆਂ ਦਾ ਬੜਾ ਦੇਖ ਨੂੰ ਸੋਣ। ਵਿਚਾਰ ਕਰਨਾ। ਉਹ ਵੀ ਵਿਦਿਆਰਥੀ ਵਿਚਾਰ ਨਹੀਂ ਕੀਤਾ ਜਾਂ ਸਭ ਜਾਣ। ਕਿਉਂਕਿ ਸਾਬ ਸਨਗੀ ਪੰਡਿਤ ਵੀ ਕੋਈ ਵਿਦਵਾਨ ਉਸ ਨੂੰ ਵਿਦਿਆਰਥੀ ਸਾਰਿਆਂ ਦੇ ਮੱਥੇ ਦੇ ਲੇਖ ਕਹਿੰਦੇ ਸੀ ਕਿ ਦੇਖ ਕੋਲ ਪਾਸੋਂ ਵਰਤਰਾਇਤ ਕਰ ਲਿਆ। ਦੇਖ ਕੇ ਉਹ ਵਰਤਰਾਇਤ ਉਸ ਨੇ ਸਾਰਿਆਂ ਦੇ ਮੱਥੇ ਦੇ ਲੇਖ ਦੇਖ ਲਿਆ ਤੇ ਸਮਝ ਲਿਆ ਕਿ ਕੋਈ ਖੇਤਰੀ ਪਈ ਹੋਈ ਮੁਖਾਨ ਕੋਈ ਕੱਜ ਉਸ ਖੋਪਰੀ ਦੇ ਅਖਰ ਮਿਲੇ ਹੋਏ ਸੀ ਉਸ ਨੇ ਕਹਿ ਲਿਆ ਕਿ ਇੰਨੇ ਸਾਲ ਉਸ ਨੂੰ ਦਿਉਣੇ ਇੰਨੇ ਸੁੱਖ ਹੋ ਗਏ ਅੱਗੇ ਹੋਏਗਾ ਨਹੀਂ ਕਿ ਇਹ ਮਿੱਟੀਆ ਇਹ ਸੁਣਵਾ ਕੇ ਪੰਡਤ ਉਹ ਖੋਪਰੀ ਘਰ ਵਿੱਚ ਲਿਆ ਤੇ ਸੰਦੂਕ ਵਿੱਚ ਰੱਖ ਦਿੱਤੀ ਜਿਹੜੇ ਸੰਦੂਕ 'ਚ ਅਖਰ ਸੀ ਉਹਦੇ ਘਰ ਆਈ ਨਹੀਂ ਜਦੋਂ ਕੋਲੇ ਗੁੰਗਰਾਏ ਖੋਲੇ ਆ ਵੇਖਿਆ ਵੀ ਆ ਖੋਪਰੀ ਰੱਖੀ ਉਹ ਮੇਰੇ ਮਾਰਨ ਵਾਲਾ ਤੇ ਮੇਰੇ ਨਾਲ ਗੁੰਜਰ ਤੀਸਰ ਜੇ ਉਸ ਕਰਕੇ ਉਹਨੂੰ ਬੜਾ ਡਰ ਉਸਨੂੰ ਖੋਪਰੀ ਨੂੰ ਚੰਗੀ ਤਰ੍ਹਾਂ ਧੀ-ਧੀ ਕੇ ਉਸ ਉਹਦੇ ਦਰਿਆ 'ਚ ਢੋੜ ਦਿੱਤਾ ਜੇ ਦਰਿਆ 'ਚ ਲੋਕਾਂ ਸਿੱਕੇ ਨੂੰ ਪੰਡਿਤ ਹੋਏ ਉਹ ਰੇ ਰੇ ਕੋਈ ਦਵਾਈ ਨਹੀਂ ਪੀ ਜਾ ਜਦੋਂ ਸੰਦੀਪ ਖੋਲ ਕੇ ਕਿ ਜਾਇ ਤੇ ਖੋਪਰੀ ਕੋਈ ਸੀ ਕਹਿੰਦੇ ਤਾਂ ਮੇਰੇ ਮਾਰ ਨੂੰ ਰੱਖੀ ਸੀ ਲਿਆ ਕੇ ਇਹ ਨਖਾਂ ਜਿਹਾ ਤੇ ਰੱਖਿਆ ਸੀ ਕਹਿੰਦੇ ਜੱਸੇ ਹੋਈ ਇਹ ਲੀ ਮੈਂ ਤਾਂ ਪੀ ਕਰਨਾ ਸੀ ਕੋਈ ਕਹਿੰਦੇ ਉਹ ਕਹੀ ਵੀ ਵਿਗਿਆ ਸੀ ਅੱਖਰ ਵੀ ਪਾਈ ਸੀ ਪਰ ਮਾਰੇ ਵੀ ਦੀ ਵਿਚਾਰ ਨੂੰ ਵੀ ਗਾਹਣੇ ਇਹੋ ਜਿਹਾ ਕਹਿੰਦੇ ਕਿ ਜੇ ਬੁਕਾਰ ਉਹ ਵੀ ਕਹੀ ਲੁੱਡਿਆ ਹੈ ਜੇ ਸਾਰਿਆਂ ਦੇ ਮਥਰੇ ਤੇ ਕੜੀ ਲੋਹ ਕਲਮੂਨ ਲਿਖੋ ਦੇਖ ਮਾਤਰੀ ਉਹ ਵੀ ਵਿੱਗੇ ਨੂੰ ਕੌਣ ਜਾ ਜਿੰਦੇ ਤੋਂ ਆਈਏ ਉਸ ਦੇ ਨਿਸ਼ਾਨੇ ਬਲਣੇ ਤੋਂ ਪਹਿਲਾਂ ਹੀ ਉਹ ਕਹਿੰਦਾ ਸਕਦਾ ਹੈ ਸ਼ਰੀਰ ਨੂੰ ਸਾਜ ਕਰਕੇ ਕਹਿਣ ਉਹ ਮਿੰਗੀਆਂ ਸ਼ੇਮਾਂ ਦੇ ਜਰ ਹਿੱਕੇ ਸਾਰੇ ਸ਼ਰੀਰ ਦੇ ਅੰਦਰ ਬਣਦੇ ਰੇ ਉਹ ਸੁਣੇ ਮੀਨੇ ਨੂੰ ਸਾਰੇ ਸੌ ਜਨੂ ਦਾ ਗਿਆਨ ਹੋ ਜਾਂਦਾ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਉਹ ਸ਼ਰੀਰ ਨੂੰ ਸਾਜ ਕਰਕੇ ਸਿਰ ਇੱਕ ਸਿੰਦੇ ਉਪੀਸ਼ੇ ਕਰ ਲੈ ਮਿੱਟੀ ਕਰ ਦਿੰਦਾ ਉਸ ਪਰਮੇਸ਼ਰ ਦੇ ਅਸਰ ਵੀ ਦਾਇਨ ਹੋਵੇ ਬੰਨ ਕੌਣ ਦੱਸ ਸਕਦਾ ਸਿੱਧਾ ਗਾਇ ਨਹੀਂ ਜਾਂਦਾ ਕਿਸੇ ਦੇ ਕੋਲ ਗਾਇ ਤੂੰ ਕੀ ਲੈ ਫਿਰਸੇ ਇਹ ਕਿਹੋ ਜਿਹਾ ਸਿਰਮੇਸ਼ਰ ਦੇ ਦੇਖੋ ਜੀਵ ਜਿਹੜਾ ਹੈ ਉਹ ਜਿਸ ਪਰਮੇਸ਼ਰ ਦੀ ਦੇ ਨੀ ਲੈ ਤੇ ਬਹੁਤ ਖੁਸ਼ੀਂ ਜੀਏ ਅੰਦਰੋਂ ਇਹ ਵੀ ਫੇਦੇ ਕੰਮ ਦੀ ਦੇ ਨੀ ਹੈ ਇਹ ਜੀ ਕੋਲ ਮੇਰੇ ਚੇਤਨਿ ਸ਼ਕਤੀ ਦੇ ਆਸਰੇ ਇਹ ਜੀ ਆਪਣੇ ਦੇਹ ਵੀ ਪੱਕੀ ਹੋਈ ਹੈ ਧਾਰਨੀ ਪੱਕੀ ਨੂੰ ਇਸ ਨਾਲ ਦੀ ਉਸ ਪਰਿਵੇਸ਼ੇ ਦੇ ਬਾਨੀ ਕੋਲ ਜਾ ਸਕਦਾ ਹੈ ਜੀਵਾਂ ਦੇ ਪਾਸੋਂ ਇਹ ਨੂੰ ਇਹ ਦੇਵਿੰਦ ਹੈ ਇਹ ਸ੍ਰੀ ਪਰਮੰਤੂ ਪੂਰੀ ਹੋਈ ਕੋ ਲੈ ਲੈਂਦਾ ਉਹ ਤੋਂ ਫੇਰ ਪਰਮਾ ਅਨੁਸਾਰ ਦੇ ਦੇ ਦਿੰਦਾ ਉਸ ਬ੍ਰਹਮੇਸ਼ੀ ਨੂੰ ਕਹਿੰਦਾ ਅਸਈਦਾ ਹੈ ਦਾਤਾ ਕੋ ਜਪਿ ਜਿਸੇ ਦੂਰ ਉਸ ਬ੍ਰਹਮੇਸ਼ੀ ਨੂੰ ਕਹਿੰਦਾ ਅਸਈਦਾ ਦੇ ਬੰਨੀ ਜਿਹੜਾ ਜਾਣਣ ਕੋ ਵੀ ਬੁੱਧੀ ਕਰਕੇ ਦੂਰ ਹੈ ਜਿਹੜਾ ਅੱਖਾਂ ਆਏ ਦੇਖਣ ਕੋ ਵੀ ਦੂਰ ਹੈ ਸੰਗ ਨਹੀਂ ਕਹਿੰਦੀ ਨੇਤਰਾਂ ਨਾਲ ਵੀ ਉਹਦੇ ਰੂਪ ਦੀ ਉਹ ਬੁੱਧੀ ਕਰਕੇ ਆਪ ਵੀ ਕਰਕੇ ਵੀ ਅਸੀਂ ਜਾਣ ਨਹੀਂ ਸਕਦੇ ਕਿਸੇ ਦੇ ਰੂਪ ਨੂੰ ਜਾਪੇ ਜਿਸੇ ਦੂਰ ਜਿੰਨੇ ਵੇਖੀ ਸਕਣ ਵਾਲੇ ਅੱਖਾਂ ਦੇ ਨਾਲ ਦੂਰ ਲੇ ਨੇ ਉਸ ਤੋਂ ਮਹਿਸੂਸ ਹੋਣਾ ਸਕੇਦਾ ਨਹੀਂ ਜਾ ਸਕਦਾ ਗਾਇ ਕੋ ਵੇਖਾ ਹਾਜ਼ਰਾ ਹਾਜ਼ੀਰ ਕੋਈ ਹੋਰ ਹੀ ਕੋਣ ਸਿਬਾ ਦਾ ਸਕਦਾ ਜੇ ਤੋਂ ਅੰਵੇੜੇ ਹੋ ਕੇ ਕ੍ਰਿਸ਼ਣੇਸ਼ਵਰ ਸਭ ਮੁੱਕਰ ਪਿਆ ਜਾਏ ਕੋਆ ਸਾਧੀਆਂ ਪ੍ਰਤੀਕਾਂ ਨੂੰ ਦੇਖ ਰਿਹਾ ਹੈ ਜੋ ਹੀ ਚੰਗਾ ਕੰਮ ਕਰਦਾ ਉਹ ਹੀ ਦੇਖਦਾ ਹੈ ਜਿਹੜੇ ਭਲੇ ਕੰਮ ਕਰਦੇ ਹਨ ਕਿਹਨੂੰ ਪੜਦੇ ਹਨ ਤੁਹਾਡਾ ਇਹ ਤਾਰ ਜਿੰਨੇ ਸੰਸਾਰ ਉਹਦੀ ਸ਼ਕਤੀ ਦੇ ਆਸਰੇ ਹੀ 'ਚ ਪਤਾ ਲੱਗ ਜਾਂਦਾ ਨਾ ਕਹਿੰਦੇ ਕੋਰੀ ਅਸੀਂ ਦੇਖਦੇ ਹਨ ਕਿਹਨੂੰ ਪੜਦੇ ਹਨ ਮੌਮੇ ਮੰਨਕਾਰ ਨੂੰ ਸੇਈ ਮਹਾਰਾਜ ਜਾਣ ਲੈਂਗੇ ਉਹ ਸਾਰਿਆਂ ਦੇ ਹਾਜ਼ਰਾ ਹਜ਼ੂਰ ਮੇਰੇ ਤੋਂ ਮੇਰੇ ਹੋ ਕੇ ਸਾਡੇ ਸਹੰਨੇ ਹਜ਼ੂਰ ਮੇਰੇ ਹੋ ਕੇ ਵੇਖਿਆ ਜੇੜਾ ਉਸ ਨੂੰ ਜੀ ਕੇ ਬਾਲ ਨੂੰ ਕੋਈ ਦੰਦ ਨਹੀਂ ਗਿਆ ਹੈ ਕਹਨਾ ਕਦੀ ਨਾ ਆਵੇ ਤੂ ਤੇ ਉਸ ਨੂੰ ਜੀ ਕੇ ਕੋਈ ਨਹੀਂ ਕਥਨ ਕਥਾ ਦੇ ਕਥੀ ਕਥਨੀ ਕਰਨੀ ਕਰਕੇ ਉਹਦੀ ਕਥਾ ਦਾ ਕੋਤੇ ਹੀ ਨਹੀਂ ਆਉਂਦਾ ਉਹਦੀ ਕਥਾ ਹੀ ਨਹੀਂ ਪੂਰੀ ਕਹਨ ਕੀਤੀ ਜਾਂਦੀ ਕਿਸੇ ਦੇ ਕੋਲ ਸਾਥੇ ਸਾਥੇ ਕਥੀ ਕੋਈ ਇੰਦੇ ਤੇ ਹੋਣੀ ਨਹੀਂ ਤਾਂ ਨਾ ਆਏ ਕਹਿੰਦਾ ਕਿ ਕੱਜਦੀ ਹੈ ਗਿਣਤੀ ਹੋ ਸਕਦੀ ਹੈ ਮਨ ਤੇ ਕਾਠ ਕਾਠ ਕਥੀ ਕੋਤੀ ਕੋੜ ਕੋਦ ਕਰੋਨਾ ਬ੍ਰਹਮਾ ਰੋਸ਼ ਪਰਮੇਸ਼ਰ ਦੇ ਕਥਨ ਆਏ ਹੋ ਕੇ ਕਥਾ ਕੱਢੀਆ ਅਗੇ ਕਰੋਨਾ ਸ਼ੀਵਾਂ ਨੇ ਇਸ ਤਰ੍ਹਾਂ ਨਹੀਂ ਕਹਾ ਕਹਣ ਵਾਲੇ ਹੋ ਕੇ ਕੁੱਝ ਕੀਤੀਆਂ ਕਰੋਨਾ ਵਿਸ਼ਣੂ ਕੋਈ ਆਣ ਨੇ ਕੋੜਾ ਰੂਪ ਦਾ ਆ ਕੇ ਕਹਾਂ ਕਥਾ ਹੈ ਕਦ ਕਰ ਹੋ ਕੇ ਕਿ ਥਾਪੜ ਕਹਾ ਜਿਵੇਂ ਨਹੀਂ ਕਹਿੰਦੀ ਕਿ ਕਰੋਨਾ ਜੀਉ ਨਹੀਂ ਦੇ ਦੇ ਕੇ ਦੇਰ ਵੀ ਗਰੀ ਕਸਨਾ ਪਸੀਨਾ ਆਵਾ ਦਰੋਤ ਉਹ ਕਿਸੇ ਦੇ ਕੰਨੀ ਕਰਕੇ ਪਰਮੇਸ਼ਰ ਦੇ ਜਹਜਾ ਤੇ ਕਾਮੀ ਹੁੰਦਾ ਉਹ ਵਿਅੰਤ ਹੈ ਉਹ ਪਰਮੇਸ਼ਰ ਦਾ ਜਸ ਜਿਹੜਾ ਹੈ ਦੇ ਲੈਂਦੇ ਖੱਤ ਪਾ ਕੋਈ ਵੀ ਨਹੀਂ ਗਾ ਸਕਦਾ ਕਿਉਂਕਿ ਹਾਂ ਗਾਉਂਦੇ ਤਾਂ ਹੈ ਕੋਈ ਕੋਈ ਜਾਂਦੇ ਹੈ ਬਾਵਕ ਤਾਣ ਕੋਈ ਉਸ ਦੁਨੀਆ 'ਚ ਦੇ ਭਾਈ ਤਾਣ ਬਲ ਨੂੰ ਜਾਂਦਾ ਹੈ ਹੋਵੇ ਕਿਸੇ ਤਾਂ ਜਿੰਨ ਕਿਸੇ 'ਚ ਤਾਣ ਬਲ ਹੁੰਦਾ ਉਹਨਾਂ ਕੋਲ ਦੇ ਤਾਣ ਨੂੰ ਬਲ ਨੂੰ ਜਾਂਦੇ ਬਾਕੀ ਦਾ ਨਾ ਕੋਈ ਬਲ ਨਹੀਂ ਹੈ ਸਿਰਫ ਜਿੰਨਾਂ 'ਚ ਆਲ ਵਿੱਚ ਹਿੰਮਤ ਹੈ ਸਦਵਾ ਕੋਲ ਨੂੰ ਪਾਈ ਜਾਂਦੇ ਹੁਣ ਦਾਤੂ ਬਾਤ ਜਾਣੇ ਨਿਸ਼ਾਨ ਕੋਈ ਉਦੋਂ ਦੇਖੀਏ ਬਾਤਾਂ ਦੇ ਪੈਨ ਧਾਰੇ ਹੋਣਗੇ ਜੀਤ ਬਾਤ ਨੂੰ ਨਿਸ਼ਾਨ ਪਰਗਟ ਹੋਈ ਹੈ ਉਸ ਜਾਨੀ ਜਾਣ ਕਰਕੇ ਕਿ ਨਹੀਂ ਇਹ ਬਾਤ ਕਿਸੇ ਨੇ ਗੁਣ ਪ੍ਰਾਪਤ ਹੋਏ ਆ ਉਹ ਗੁਣ ਉਹਦੇ ਕਹਿੰਦੇ ਕਿ ਨਹੀਂ ਗੁਣ ਸਕੇ ਪਰਸਾਂ ਨੂੰ ਜੇ ਕਿਸੇ ਨੂੰ ਵਿਦਿਆਈਆਂ ਮਿਲੀਆਂ ਹਨ ਚਾਰੂ ਸੁੰਦਰ ਉਹ ਵਿਦਿਆਈਆਂ ਨੂੰ ਜਾਉਂਦਾ ਜੇ ਕਿਨੂੰ ਆਚਾਰ ਤੱਤ ਚੰਗੇ ਮਿਲੇ ਸ੍ਰੇਸ਼ਟਾ ਤਾਂ ਉਹਦੇ ਤੱਤਾਂ ਨੂੰ ਵੀ ਅੰਤ ਨਹੀਂ ਹੁੰਦਾ ਬਿਆਕਣ ਪੜਿਆ ਹੋਇਆ ਹੋਵੇ ਵਿਆਕਰਨ ਪੜਿਆ ਹੋਵੇ ਹਨ ਵੇਖੋ ਮੇਰੇ ਤਿਆਸ ਜਰ ਗਿਆ ਪਹਿਲਾਂ ਸਰੀਰ ਨੂੰ ਸਾਜਣਾ ਕਰਦਾ ਸੂਖੀ ਤੇ ਕਹਿੰਦਾ ਰਾ ਸੂਖੀ ਸ੍ਰੀ ਦਾ ਜੀ ਦਾ ਹੈ ਦੇਖ ਧੂਲ ਤੇ ਕਹਨਾ ਮਲੇ ਮਾਤਿ ਤੇ ਕਾ ਪਿੰਡ ਤੋਂ ਆਇਆ ਜਿੰਨ ਕਰਕੇ ਲੇਖ ਨੂੰ ਫੇ ਮਿੱਟੀ ਦੀ ਬਲਾਰ ਲੇਖ ਕਰ ਜਾਂਦਾ ਮਾਤੀ ਹੀ ਮਾਤੀ ਲਈ ਇਸ ਦਾ ਵੀ ਹਾਲ ਹੋ ਜਾਂਦੀ ਹੈ ਜਿਹੋ ਪ੍ਰਵੇਸ਼ੇ ਜਸਨ ਕੋਈ ਇਹ ਜੀ ਨਾ ਨਹੀਂ ਕਿ ਮੇਰਾ ਕੇ ਗਾਉਂਦਾ ਹੈ ਦਾਵਤੇ ਨੀ ਲਾ ਫਿਰਦੇ ਇਹ ਬਈ ਸਾਂ ਸੰਗੀ ਨੂੰ ਗਾਉਂਦੇ ਸਨ ਕਿ ਦੇਹ ਨੂੰ ਇੱਕੀ ਮੋਤੀ ਨੂੰ ਲਈ ਫਿਰਦਾ ਹੈ ਇਹ ਮਾਨਾ ਦੀ ਆਸਰੀ ਹੈ ਨਾ ਇਸ ਪ੍ਰਕਾਰ ਜੀਆਂ ਦੇ ਪਾਸੋਂ ਉਹ ਲੈ ਲੈਂਦਾ ਪ੍ਰਮੇਸ਼ਰ ਤੇ ਹੋਰ ਦੇ ਵਾਸ਼ਨਾ ਅਨਸਾਰ ਦੇ ਦਿੰਦਾ ਕਈ ਇਹ ਮਾਰਾ ਨੂੰ ਗਾਉਂਦੇ ਹਨ ਤਾਵਾ ਤੇ ਜਪ ਦ੍ਰਿਸ਼ ਦੀ ਅਗੇ ਲਈ ਇਹ ਗਾਉਂਦੇ ਤੇ ਜਾਨੂ ਤੋਂ ਤੇ ਦ੍ਰਿਸ਼ ਤੋਂ ਦੂਰ ਹੈ ਪਰਮੇਸ਼ਰ ਇਸ ਪ੍ਰਕਾਰ ਗਾਉਂਦੇ ਹਨ ਤਾਵਾ ਤੇ ਵਿਖਾ ਹਾਜ਼ਰਾ ਹਰੀ ਕਈ ਕਹਿੰਦੇ ਪਰਮੇਸ਼ਰ ਹਾਜ਼ਰਾ ਹੂ ਮੇਰੇ ਤੋਂ ਨੇੜੇ ਹੈ ਇਸ ਬਰਕਾਰ ਵੇਹ ਕੈ ਉਸ ਪਰਮੇਸ਼ਰ ਨੂੰ ਮੰਨਦੇ ਹਨ ਕਥਲੇ ਕਥੀ ਨਹਾਵੇ ਵਾਲੇ ਜਿਹੜੇ ਉਸ ਪਰਮੇਸ਼ਰ ਦੀ ਕਥਨ ਕਥਾ ਨੂੰ ਕਦੀ ਕੰਦੇ ਆ ਕਸਮ पर म्हारे जी कसहदा कोता नहीं आउंदा पाछे पाछे कथि कोती कोती के अरुत केहू न आए हो के लखण कोटियां दे के कछु न की थी वर्तमान कहवे कि लखण ने कहीं वाले ਉਹ ਵੀ ਦੱਸਿਆ ਗਿਆ ਅੰਤਮੀਆਂ ਦਾ ਜੰਤ ਹੈ ਪਰਮੇਸ਼ਰ ਉਸੇ ਪ੍ਰਕਾਸ਼ ਹੋਰ ਕੋਣ ਦਾਰਾ ਕੋ ਤਾਣ ਹੋਰ ਕਿਸੇ ਤਾਣ ਜਿਨਹਰਾ ਆਪ ਕਿਰਪਾ ਕਰਕੇ ਦੇਖੋ ਉਸ ਜੀ ਹੈ ਤਾਂ ਮਾਰੇ ਸਾਰ ਕੋਈ ਨਹੀਂ ਸਿੱਧੋ ਬਾਵਾ ਦੇ ਤਾਣ ਬਲਦੇ ਕੋਈ ਨਹੀਂ ਹੈ ਹੋਰ ਕਿਸੇ ਤਾਣ ਜਿਨਹ ਕਿਸੇ ਤਾਣ ਬਾਲੀ ਰਖਾ ਹੈ ਜੀ ਵੀ ਰੱਖਿਆ ਕੀਤੀਓ ਮਾਰੇ ਬਾਲ ਨੂੰ ਜਾਣੇ ਮੇਰੀ ਆਸ ਨੇ ਰੱਖਿਆ ਕੀਤੀ ਪਰਮੇਸ਼ਰ ਜੀ ਸਈ ਉਹਦੇ ਬਾਲੇ ਤਾਂ ਹੀ ਜਾਣ ਕਰਕੇ ਹੰਨ ਜਾਣੇ ਬਾਤ ਜਾਣੀ ਦਿੱਤੀਆਂ ਇਸ ਪ੍ਰਕਾਰ ਉਹ ਮਾਰੇ ਨੇ ਬਾਤਾਂ ਦੇ ਤਾਂ ਹੀ ਜਾਣਦੇ ਹੰਨ ਜਾਣੇ ਕੋਲੋ ਮਲੇਈਆ ਚਾਹ ਜੀ ਦਇਆ ਕਰਨ ਵਿਚਾਰ ਓ ਦਿਨੋ ਦੇ ਸਹੇਦੇ ਤੇ ਪ੍ਰਮੇਸ਼ਰ ਦੀਆਂ ਬੜੀਆਂੀਆਂ ਨੂੰ ਫਰੈਸ਼ ਬਉਂਦੇ ਹਨ ਦਾਤਾ ਗੁਦਿਆ ਵਿਖਣੀ ਜਾਰ ਕਈ ਜੀ ਵਿਗਿਆਨ ਲੋਕਾ ਕੇ ਇਸ ਪ੍ਰਮੇਸ਼ਰ ਦਾ ਵਿਗਿਆਰ ਕੇ ਗਾਉਂਦੇ ਹਨ ਗਾਉਂਦੇ ਹਨ ਇਸ ਪ੍ਰਮੇਸ਼ਰ ਦੇ ਨਾਮ ਇਹ ਦੇਖੋ ਮਾਰਾ ਸਾਜ ਦੀ ਇਹ ਸਰੀਰ ਨੂੰ ਸਾਜਣਾ ਕੀਤਾ ਹੈ ਜੋ ਸਾਜ ਖਾਜ ਕਰਕੇ ਇਸ ਨੂੰ ਖੇ ਵੀ ਕਰਦੇ ਆ ਆਪਣੀ ਸੁਰੱਖਿਆ ਦੇ ਕਹਤ ਉਹ ਅੰਤਰੀਅਨੀ ਸਰਬੰਧ ਹੈ ਜੇ ਸਰਬੰਧ ਜਾਣ ਕੇ ਗੁੰਦੇ ਹਨ ਕਾਲਕ ਦੀਆ ਲੈ ਫਿਰਦੇ ਇਸ ਤੋਂ ਕਾਲ ਹਵਾਨੀ ਦੀ ਨੂੰ ਜੇ ਦੇਖੋ ਦੀਵਿਆਂ ਦੇ ਪਾਸੋਂ ਤੇ ਲੈ ਲੈਂਦਾ ਅਤੇ ਫੇਰ ਸੁਪੀ ਪਾਰਸ਼ਾ ਉਹਨਾਂ ਦੀਵਿਆਂ ਦੇ ਪਾਸੇ ਦੇਰ ਵੀ ਦਸ਼ੀ ਕਰ ਦਿੰਦਾ ਜਿਹਦੀ ਕੋਈ ਦੀ ਵਾਸ਼ਨਾ ਹੁੰਦੀ ਹੈ ਜੇ ਗਾਉਂਦੇ ਆ ਕੀ ਜੀ ਉਸ ਨੂੰ ਕਹਿੰਦੇ ਦੇਖੋ ਇਹ ਨੂੰ ਲਈ ਫਿਰਦਾ ਉਹ ਜਾਣ ਕੇ ਵੀ ਦੌਂਦੇ ਇਸ ਹੋ ਕੇ ਸਾਰੇ ਤੇ ਜਪ ਜਸ ਦੂਰ ਜੀ ਗੰਦੇ ਤੇ ਆ ਸਾਰੀਆਂ ਤੇ ਦੂਰ ਤੱਕ ਦੇਖਦਾ ਸਾਡੀ ਦ੍ਰਿਸ਼ਟੀ ਨਾਲ ਉਹ ਕੰਮ ਨਹੀਂ ਹੋ ਗਾਉਂਦੇ ਕਈ ਸਾਰੇ ਜਾਣ ਕਰਕੇ ਪ੍ਰਵੇਸ਼ ਨਹੀਂ ਜਾਣਦੇ ਹੋਣਗੇ ਜੇ ਸਰਕਾਰ ਸਾਹਿਬ ਸੰਗੇ ਜੀ ਕੇ ਦਾ ਵੇ ਤਾਣ ਹੂ ਵੇ ਕਿਸੇ ਤਾਣ ਜੇ ਕੋਈ ਕਿਸੇ ਦਾ ਪ੍ਰਮਾਣ ਵੀ ਦੇ ਕੋਈ ਕਹੋਂ ਕਹੋਂ ਨਾ ਮਿਲੇ ਆ ਤਾਂ ਗੁਰੂ ਮਹਾਰਾਜ ਸਾਹਿਬ ਕਹਿੰਦੇ ਉਹ ਗਾਉਂਦੇ ਤਾਂ ਕੋਈ ਕਾਣ ਬੰਦ ਹੀ ਪ੍ਰਾਣਾ ਵਾਲੇ ਵਿਆਸ ਰਚੀ ਜੀ ਉਸ ਦੇ ਵਿੱਚ ਜੇ ਕਾਣ ਗਾਉਂਦੇ ਆ ਉਹਦੇ ਕਿਸੇ ਕਾਣ ਰੱਖਿਆ ਹੋਈ ਹੈ ਕਹਾ ਨਾਜ ਭਗਤੀ ਜਿਹਨੇ ਰੱਖਿਆ ਸੀ ਮਹਾਰਾਜ ਨੇ ਕੀ ਹੁੰਦਾ ਅਕੀਨ ਜਿਹਨੇ ਦਰਸ਼ਨ ਦਿੱਤੇ ਉਹ ਪ੍ਰਾਣਿਕ ਮਤਵਾਇਆ ਪਰਮੇਸ਼ਰ ਦੇ ਕਾਣੀ ਵਿਆਸ ਰਹੀ ਦੇ ਬਿਤੇ ਉਹ ਪ੍ਰਾਣ ਹੁੰਦਾ ਉਹ ਪ੍ਰਾਣਾਂ ਦੁਆਰਾ ਸਕੇ ਪਾਰਸ਼ਾ ਦੇ ਪੰਜ ਰਾਤ ਗ੍ਰੰਥ ਬਣਾਇਆ ਨਾਰਦ ਗੁਨੀ 11 ਪ੍ਰਕਾਰ ਦੀ ਕਹਾਣੀ ਉਸ ਲਿਖੀ ਹੈ ਉਹ ਕੋਈ ਪੰਜ ਰਾਤ ਦੇ ਗਿਆਨ ਵਾਲਾ ਨਾਰਦ ਗੁਨੀ ਜੋ ਹੈ ਕੋ ਮਾਰਨ ਸਾਹਿਬ ਦੇ ਦਾਤਾਂ ਨੂੰ ਲੈਣ ਆਏ ਇਸੇ ਸਾਡੇ ਤੇ ਕੋ ਮਾਰਨ ਜੈ ਮਈਆ ਕੋ ਗੰਕੇ ਜਪਰਾਨੀ ਕਵਨ ਮੂਲ ਤੇ ਕਵਨ ਨਿਸਾਨੀ ਜਿੰਤੂ ਸਾਲ ਤਵਾਰ ਕੀ ਜਾ ਰਿਹਾ ਸਰਵ ਦਾਤਾਂ ਨੂੰ ਪੰਜ ਰਾਤ ਕੋ ਵਾਲਾ ਨਾਰਦ मुनि ਨਿਸ਼ਾਨ ਕਰਕੇ ਕਰਕੇ ਜਾਂਦਾ ਹੈ। ਉਸ ਪਰਮੇਸ਼ਰ ਨੇ ਸਾਖ ਦੇ ਕਰਤਾ ਜਿਹੜਾ ਹੈ गोपनी माता देव हुती वे पानी उसमें विदेश चुका है उस परमेश्वर के साखी केता खेल में विनाश के जिस असंगीय हु परखा ਇਸ ਪ੍ਰਕਾਰ ਪ੍ਰਕਿਰਤੀ ਕਰਕੇ ਜੇ ਕੀ ਨੀ ਗੋਣਾ ਕਿਸਾਨੇ ਕੋਈ ਇਹਨਾਂ ਪ੍ਰਧਾਨ ਕਹਾਵੇ ਕੋਈ ਸੁਣੋ ਜਿਹਾ ਦੀ ਸਾਮੀਆਂ ਵਾਸਾ ਜਿਹੜੀ ਪ੍ਰਧਾਨ ਮਾਇਆ ਹੈ ਉਹ ਪ੍ਰਧਾਨ ਮਾਇਆ ਵਿਚਾਰੂਕ ਹੋ ਕੇ ਜਿਹੜੀ ਪੱਤੀ ਪ੍ਰਕਿਰਤੀ ਵੀ ਵਿਚਾਰ ਕਰਕੇ મોਹ ਮੰਨਦਾ ਹੈ ਅਤੇ ਉਹ ਰੂਪ ਹੋਈ ਜਿਹੜੀ ਇਹਨਾਂ ਨੂੰ ਭੋਗੀ ਚ ਲੱਗਣਾ ਉਹ ਬੰਧਨ ਨੂੰ ਮੰਨਦਾ ਹੈ ਇਸ ਪ੍ਰਕਾਰ ਉਹਦੇ ਗੁਨਾ ਨਹੀਂ ਇਹਦੀਆਂ ਵਿਦਿਆਨੀਆਂ ਨੂੰ ਸਾਥ ਕੱਦਲ ਮੇਰੀ ਸੰਸਕਾਰਲਾ ਵਰਗਾ ਸੰਦੇਸ਼ ਜਾਣ ਕਰਕੇ ਸਾਖੀ ਦੇ ਕਾਦੇ ਮਿਰਗੰਸ ਸਿੰਘ ਲੜ ਕੇ ਕੁਝ ਨਹੀਂ ਕਰ ਗਿਆ ਹੈ ਜਾਤਿ ਵਿਦਿਆ ਵਿਖ ਨੂੰ ਦੀਚਾ ਜੋ ਜੋਤਨ ਰਹੀ ਜਿਹੜਾ ਹੈ ਇਹ ਜੀ ਵਿਦਿਆ ਜੋ ਨਿਆਸ ਸ਼ਾਸਤਰ ਇਹਦਾ ਜਥਮ ਬੜਾ ਕਠਨ ਵਿਚਾਰ ਹੈ ਕਿ ਹੋਈ ਕੋ ਨਾਰਮਨ ਸਤਿਗੁਰਾਂ ਜਮਨ ਕੋਈ ਨਾ ਹੋ ਕੋ ਕ੍ਰਿਸ਼ਟੀ ਮੰਦਾ ਹੈ ਇਹ ਜੀਵੀ ਹੁੰਦਾ ਭੇਦ ਜਾਣ ਹੋਵੇ ਸਮੀ ਮੰਦਾ ਇਸਰੀਏ ਤੇ ਦੇਸੀ ਮੰਦਾ ਹੈ ਅਬੇ ਆਤਮਾ ਦੇ ਤਾਈ ਅੱਗਾ ਜੜ ਮੰਦਾ ਹੈ ਅੱਗਾ ਤੇਤ ਮੰਦਾ ਹੈ ਇਹ ਕਹਿੰਦੇ ਜੀ ਇਹ ਸੁਖੋਤ ਦੇ ਸਾਇਕਿਆ ਮੇਰੇ ਜੜ ਹੁੰਦਾ ਹੈ ਜਦੋਂ ਸੁਪਨ ਵੀ ਹੁੰਦਾ ਤੇ ਜਾਗਦ ਵੀ ਮੇਰੇ ਤੇਤ ਹੁੰਦਾ ਇਹ ਮੰਦੀ ਹਾਲਤ ਨਹੀਂ ਆਤਮਾ ਮੰਨੀ ਬੈਠੇ ਅਨੰਦ ਵਿੱਚ ਉਸ ਹੀ ਆਤਮਾ ਮੰਦਾ ਹੈ ਇਸ ਪ੍ਰਕਾਰ ਦੇ ਅਨਿਆਇ ਤੇ ਜੁਗਤੀ ਭੁਜਾਉਣੇ ਇਹ ਉਹ ਕਹੀ ਵਿਦਿਆਰਥੀ ਅਦਾਰ ਕਰਦਾ ਹੋਇਆ ਇਹ ਕਹਿੰਦਾ ਹੈ ਕਿ ਸੁਖਗਤ ਵਿੱਚ ਕੋਈ ਗਿਆਨ ਨਹੀਂ ਹੁੰਦਾ ਕੋ ਜਿਹੜਾ ਕੋਈ ਗਿਆਨ ਨਹੀਂ ਜਾਣ ਵਾਲਾ ਕੋਈ ਹੈ ਕਿ ਨਹੀਂ ਵਿਦਾਂਤੀ ਇਹਦਾ ਵੀ ਜਾਣਦਾ ਹੈ ਕਿ ਮੈਨੂੰ ਅਜੇ ਕੋਈ ਸੁਖਨਾ ਨਹੀਂ ਆਇਆ ਮੈਂ ਸੁਖਨਾ ਸਿੱਖਾ ਰਿਹਾ ਸੀ ਉਸ ਨੂੰ ਪ੍ਰਗਟ ਕਰਨ ਵਾਲਾ ਕੋਈ ਹੈ ਕਿ ਨਹੀਂ ਆਤਮਾ ਹੈ ਇਹ ਦਾ ਸਾਖੀ ਹੈ ਇਹ ਕਥਿਬੀ ਲਈ ਚਾਰਗੇ ਨਿਆਇ ਦੇ ਇਸ ਤਰ੍ਹਾਂ ਵਿਗਤੀ ਪਹਾਨਾ ਜਿਹੜਾ ਉਹ ਦੇਖਣ ਜਿੱਦਿਆ ਦਾ ਵਿਚਾਰ ਕਰਦਾ ਹੋਇਆ ਕਿ ਉਹ ਸਰਵੇਸ਼ਣੀ ਇੱਕ ਦੇਸੀ ਰੂਪ ਕਰਕੇ ਸਾਰਾ ਭਾਨ ਪੂਰਿਆ ਹੁੰਦਾ ਐ ਉਹ ਵੀ ਵਿਚਾਰ ਕਰਦਾ ਹੋਇਆ ਨਿਆਇ ਮਨੀ ਨਿਆਇ ਸਾਜਨਾ ਕਰਦਾ ਜੋ ਤੁਮ ਰਿਖੀ ਉਹ ਵੀ ਜਿੱਦਿਆ ਦਾ ਕਸ਼ਮੀਰੀ ਜਿਹਾ ਵਿਚਾਰ ਕਹਿੰਦਾ ਹੈ ਗੁੰਲਹ ਦਾਵ ਕੋ ਸਾਜ ਕਰੇ ਤਨਖੇ ਇਹ ਹੈਗਾ ਦਾਵ ਕੋ ਸਾਜ ਕਰੇ ਤਨਖੇ ਇਹ ਹੈਗਾ ਪੂਰਨ ਮੀਮंसा ਇਹ ਕਹਿੰਦਾ ਕਰਮਾਂ ਦੇ ਇਨਸਾਨ ਵੇਖੋ ਇਹ ਕਾਲਵਾਦੀ ਹੈ ਇਹ ਕਾਲਵਾਦੀ ਵਿਸ਼ੇਸ਼ਕ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਸਭੀ ਸੁਖੀ ਲਏ ਹੋ ਜਾਂਦੀ ਹੈ ਜਿਸ ਤਰਕਾਰ ਬਣਦੇ ਜਿਹੜੇ ਬੀਜ ਲੁਕੇ ਆਦਿਕੂਰਤੀ ਪੈਦਾ ਹੋਏ ਆਪੇ ਬੀਜ ਪਾ ਕੇ ਖੇੜੇ ਜੇ ਗੰਗੇ ਕਾਸੀ ਦਾ ਆਪ ਹੀ ਹਰੇ ਹੋ ਜਾਂਦੇ ਉਹ ਕਾਈ ਕਰੋ ਇਹ ਵੀ ਕਹਿੰਦੇ ਸਮੀਖਰੀ ਕਰਮਾវិਹੀ ਸਿਖ ਜੀ ਇਹ ਕਾਲ ਕਰਕੇ ਪ੍ਰਵਾਰਥ ਪੈਦਾ ਹੋ ਜਾਂਦੇ ਕਾਲ ਹੀ ਸਭ ਕੁਝ ਹੈ ਇਸ ਪ੍ਰਕਾਰ ਇਹ ਹੈ ਇਹ ਕਾਲ ਨੂੰ ਜਿਹੜਾ ਹੈ ਕਾਲਵਾਦੀ ਇਹ ਕਾਲ ਨੂੰ ਕਰਕੇ ਉਹਦਾ ਕੋਈ ਕਰਦਾ ਹੈ ਇਸ ਪ੍ਰਕਾਰ ਦੇ ਸਾਰੇ ਕਾਲੀ ਫਜਨੋ ਕਰਵੇ ਸਾਰੇ ਸਰੀਰ ਨੂੰ ਖੋ ਕਰਦੇ ਨੇ ਲਾਵੇ ਤੇ ਜੀ ਲਾਏ ਫਿਰਦੇ ਗੁਰੂ ਮੀਨੋ ਸਵਾਲਾ ਹੈ ਕਰਨ ਬਾਤੀ ਇਹ ਕਹਿੰਦੇ ਜੀ ਵਸ ਅਵਸ ਨੇ ਭੁਗਤ ਜਨ ਕੀਤਨ ਕਰਨ ਸੋ ਐਸ ਨਹੀਂ ਉਹ ਭੁਗਤ ਜਨ ਨੇ ਖੀਏ ਤੇ ਕਹਿੰਦੇ ਕਿ ਕੋ ਕਰੂ ਜੀਵ ਦੇ ਚੰਗੇ ਮੰਦੇ ਜਿਹੜੇ ਜੀ ਕੀਤੇ ਉਹਦੇ ਅਨਸਾਰ ਦੇਖਦੇ ਸੁਖ ਤੇ ਆਉਣਾ ਤੇ ਜਾਣਾ ਵਰਨਾ ਜੀਨੀ ਸ੍ਰੀ ਜੀ ਦੇ ਆਕਾਰ ਸਭ ਕਰਮਾਣ ਵਾਲੀ ਬਣੇ ਹੋਏ ਆ ਕਰਮੇ ਕਰਕੇ ਦਿੱਖਤ ਕਰਨ ਨੂੰ ਤੋੜਨਾ ਪੈਂਦਾ ਹੈ ਜੇ ਉਸ ਪ੍ਰਕਾਰ ਕੀਤਾ ਕਰਨਾ ਅਨੁਸਾਰ ਜੀਵ ਜਿਹੜਾ ਹੈ ਲੈ ਲੇਗਾ ਦੇਹ ਦੇ ਕਾਇਂ ਪਰ ਅਲੱਗ ਦੇ ਮਤਨੇ ਕਰਕੇ ਫਿਰ ਉਹਦੇ ਹੈ ਬਾਦ ਦੇ ਕਰਤਾ ਜੈਮਨ ਮੁਨੀ ਹੈ ਵਿਸ਼ੇਸ਼ਕ ਦਾ ਉਹ ਹੈ ਅਗੇ ਇਸੇ ਪ੍ਰਕਾਰ ਗਿਆਏ ਦਾ ਗੋਤਣ ਕਰਤਾ ਹੈ ਇਹ ਸਨੇਹ ਦਾ ਕਦਰ ਕਰਦਾ ਹੈ ਦਾਦਾ ਕੋ ਜਾਤਿ ਦਿਸੇ ਦੀ ਇਸ ਪ੍ਰਕਾਰ ਜੋ ਵੀ ਪਤੰਜਲੀ ਇਹ ਕਰਦਾ ਹੈ ਸ਼ੇਖ ਨਾਗ ਦਾ ਆਕਾਰ ਦੂਰ ਕਹਿੰਦੇ ਜੋਗ ਕਰਕੇ ਤਾਂ ਹੈ ਜੋਗ ਨਾਏ ਤੋਂ ਬਿਗਾਰੇ ਜਿਹੜਾ ਪਰਮੇਸ਼ਰ ਦਾ ਦੇਖਣਾ ਦੂਰ ਹੈ ਇਹ ਬ੍ਰਹਮ ਲੋਕ ਦੀ ਪ੍ਰਾਪਤੀ ਨਹੀਂ ਮੁਝ ਮੰਨਦਾ ਹੈ ਉਹ ਮਾਨ ਮੰਨਦਾ ਸ੍ਰੀ ਸਿਦੀ ਜੀ ਦੇ ਪਤੀ ਮੰਨਦਾ ਹੈ ਅਤੇ ਦੇਵ ਮੰਨ ਕੇ ਰੱਖ ਲਾਉਂਦਾ ਨਾ ਇਹ ਆਪਣੀ ਆਰਥਿਕ ਜੀਵੀ ਮੰਨਦਾ ਹੈ ਇਸ ਪ੍ਰਕਾਰ ਦਸਵੀਂ ਦਾ ਅਗ ਪ੍ਰਾਨ ਚਾਹੂਂਗੇ ਨਾਲ ਹੀ ਆਪਣੀ ਇਹ ਲੋਖ ਮੰਨਦਾ ਹੈ ਇਸ ਪ੍ਰਕਾਰ ਜਿਹੜਾ ਪਤੰਜਲੀ ਰਿਸ਼ੀ ਹੈ ਉਹ ਜੋ ਕਰਕੇ ਕਹਿੰਦਾ ਬ੍ਰਹਮ ਜਾਤਾ ਜਾਣੂਗਾ ਹੈ ਤੇ ਜੋ ਕਮਾਈ ਦੇ ਬਗੈਰ ਦੂਰ ਹੈ ਦੇਖਣਾ ਨਹੀਂ ਆਇਆ ਦੇਸ਼ ਬਰਕਾਟ ਤਕਿੰਦ ਮੁਨੀ ਜੋ ਸੰਸਰ ਦਾ ਕਰਤਾ ਦੰਡਾ ਹੈ ਆਵਾ ਤੋ ਦੇਖ ਹਾਦਰ ਹਰੀ ਜਿਸ ਤਰ੍ਹਾਂ ਇਸੇ ਤੋ ਵਾਲਾ ਜੋ ਵਿਆਸ ਰਿਥੀ ਹੈ ਇਸ ਨੂੰ ਦ੍ਰਿਸ਼ਟਾਂਤ ਵਾਲੀ ਚੀਜ਼ ਸਾਰੀ ਮੁੱਖਿਆ ਮੰਨਦਾ ਹੈ ਦੇਖਣ ਵਾਲੇ ਦ੍ਰਿਸ਼ੇ ਨੂੰ ਸਤ ਮੰਨਦਾ ਹੈ ਉਹ ਹਾਗੇ ਹਰੀ ਨਿਵੇਕੋ ਮੇੜੇ ਆਤਮਾ ਸ਼ਰੀਰ ਨੂੰ ਉਹ ਬ੍ਰਹਮ ਦਾ ਦੂਜਾ ਪਾਜੇ ਇਸ ਤਰ੍ਹਾਂ ਇਹੇ ਤਾਂ ਇਹਦੇ ਜਾਣ ਕਰਕੇ ਆਪਣੇ ਆਪ ਨੇ ਜਾਣ ਕਰਕੇ ਵਿਆਸ ਜੀ ਜਿਹੜਾ ਆਪਣੀ ਜਗਾਂਬ ਜਾਸਰਿਆ ਕਰਕੇ ਉਹ ਵੀ ਇਸ ਪਰਮੇਸ਼ਰ ਇਸ ਤਰ੍ਹਾਂ ਆਪਨਾ ਰੂਪ ਨਾ ਆਵੇ ਉਹ ਜੇ ਛੜਕੀ ਦਿੱਤੀ ਕਰਕੇ ਕਿਸੇ ਪ੍ਰਕਾਰ ਅਸੀਂ ਕਥਾ ਦੇ ਕੋਟਾ ਨਹੀਂ ਆ ਸਕਦਾ। ਜੰਤ ਹੈ ਉਹ ਹੀ ਕਥਾ। ਸਾਥੇ ਸਾਥਕਾਹੀ ਕੋਤੀ ਕੋਤ ਸੇਹਰ ਪ੍ਰਾਣਾਂ ਵਾਲੇ ਨੇ ਜੈਮਨ ਮੁਨੀ ਨੇ ਵੀ, ਦੇਖ ਜਮਨੀ ਵੀ, ਪੂਰਨ ਮਨਸਾ ਵਾਲੇ ਨੇ ਵੀ ਅਤੇ ਯੋਗ ਵਾਲੇ ਨੇ ਵੀ, ਗਿਦਾਂਤੀ ਵੀ ਕੋਹਾਂ ਕੋਟ ਦੇਖਿਆ ਕਰਕੇ ਕਹਿੰਨ ਕੀਤੀ ਹੈ। ਮੈਂ ਉਹ ਦੇਰ ਹੀ ਤਸਾਵਾ ਕੋਤ ਨਹੀਂ ਆਉਂਦਾ ਬੰਦ ਰਹਿ ਜੇ ਨਾ ਫੇਰ ਪੜੋ ਗਾਇਆ ਕੋ ਤਾਣ ਮੁਰਵਾ ਕਿਸਾ ਤਾ ਇਹ ਜੀਸੂ ਉਹਨੇ ਸਿੱਖਿਆ ਗੁਰੂ ਬੇਨਤੀ ਹੈ ਅੰਮ੍ਰਿਤ ਇਹ ਨਹਰਾ ਸਿੱਖਦੇ ਕਾਹੀ ਉਸ ਬ੍ਰਹਮ ਦੇ ਕਾਹਨ ਬੰਦੇ ਕਾਹਨ ਗਾ ਜੇ ਇਹ ਆਪ ਦੇ ਬਿਨੋ ਹੋਵੇ ਕਿਸੇ ਤਾਂ ਜੇ ਕਿਸੇ ਦੇ ਗੁਰੂ ਆਪ ਜਿਹਾ ਸਾਡਾ ਬਲ ਹੋਵੇ ਤਾਂ ਗਾ ਸਕੇ ਤੂੰ ਦਾਤਾਂ ਬ੍ਰਹਮ ਦੇ ਕਾਹਨ ਕਾਹਨ ਮਾਰਾ ਗਾ ਸਕੇ ਜਿਹੜਾ ਸਭ ਦੇ ਆਦਿ ਐਸਾ ਨਿਸ਼ਾਨ ਪ੍ਰਗਟ ਕਰਕੇ ਗਾਇਓ ਉਹੀ ਜਾਣ ਸਕਦਾ ਬਰਦਾ ਸਕਦਾ ਹੈ ਨਾ ਆਪ ਦੀ ਸੱਤਿਨ ਮੰਦਰੀ ਦੇ ਗੋਣ ਆਜ ਤੋਂ ਆਜ ਦੀ ਇਹ ਬ੍ਰਹਮ ਵਿਦਿਆ ਵਿਖੇ ਵੀ ਬੜਾ ਵਿਚਾਰ ਹੈ ਅਦਕਾਈਏ ਕਹੀਂ ਆਜ ਨੂੰ ਕੌਣ ਗਾ ਸਕੇ ਆਹ ਤੇ ਸਾਜ ਕਰੇ ਤਾਂਖੇ ਕੋਈ ਯਾਨੀ ਕਹਨ ਦਾ ਸਕਦਾ ਹੈ ਜਿਹੜਾ ਸਾਜੇ ਸਰੀਰ ਨੂੰ ਦੇ ਮਾਨੁਖੇ ਕਰ ਸਕੇ ਉਹੀ ਦਾਵੇ ਨੂੰ ਅਧਿਕਾਰੀ ਦੇ ਕਾਏ ਆਹ ਤੇ ਦੀਏ ਲੈ ਸਕਦਾ ਜਿਹੜੇ ਸੀ ਭਾਗ ਨਹੀਂ ਲੈ ਕੇ ਫਿਰ ਉਹ ਹੋ ਕੇ ਬੈਠੇ ਕੋਈ ਗ੍ਰੰਥ ਵਿਆਹ ਨੂੰ ਗਾ ਸਕਦਾ ਦੂਸਰਾ ਕੌਣ ਗਾਵੇ ਗਾਵੇ ਤੂੰ ਜੱਤ ਦਿਸੇ ਦੀ ਜਿਹੜੇ ਜਨ ਤੋਂ ਦਿਸਣ ਤੋਂ ਜਿਹੜਾ ਦੂਰ ਪਰਮੇਸ਼ਰ ਹੈ ਉਸ ਨੂੰ ਫਿਰ ਸਰਗਰ ਆਦਨੇ ਕੌਣ ਗਾ ਸਕੇ ਗਾਵੇ ਤੂੰ ਵੇਖੇ ਹਾਜ਼ਰਾ ਹਦੀਰ ਵੇਖੀ ਮਾਰਾ ਕੌਣ ਗਾ ਸਕਦਾ ਆਪਕੇ ਜਿਨੇ ਸਤਨਾਮ ਇਹ ਫਿਰ ਤੋਂ ਦਾ ਕੀ ਤਾਣ ਹੋਵੇ ਕਿਸੈ ਤਾਣ ਸਭ ਤੋਂ ਸਾਈਂ ਦੀ ਜਿਹੜੇ ਅਧਿਕਾਰੀ ਜਿਹੜੇ ਗ੍ਰੰਥ ਗਿਆਨੀ ਹੋਣ ਕੋਈ ਉਹਦੇ ਕਾਣ ਵਿਵੇਕ ਦੇ ਬੰਨ ਨਹੀਂ ਗਾਉਂਦੇ ਹੋਣ ਹੋਵੇ ਕਿਸੈ ਤਾਣ ਬਿੰਦੂ ਕਾਣ ਬਲੁੰਦੇ ਦੇਵਤੀ ਕੋਰਖ ਵਿਵੇਕ ਦੇ ਬਾਰੀਆਂ ਕੰਤੀ ਬ੍ਰਿਤੀ ਕਰਦੇ ਨਹੀਂ ਦਾ ਸਕਦੇ ਲਖਮੀ ਬ੍ਰਿਤੀ ਤਾਨ ਬਲ ਕਰਕੇ ਅਸੀਂ ਦੰਗੇ ਹਨ ਗਾਵੇ ਤੋ ਬਾਤ ਜਾਣੇ ਨੀਸਾਂ ਉਸ ਵਿਕਾਰੀ ਕੋਈ ਕੌਣ ਗਾਵੇ ਜੀ ਦੀ ਆਦੀ ਨੂੰ ਇਹ ਬ੍ਰਹਮ ਗਿਆਨੀ ਜਾਣਦੇ ਉਹ ਗਾ ਸਕਦੇ ਹੋਰ ਕਿਸੇ ਨੂੰ ਚੀਜ਼ ਆਉਣਾ ਹੈ ਗਾਵੇ ਤੋ ਗੁਣ ਬਨੇ ਨੂੰ ਸੱਚੇ ਮੰਨਦੇ ਕੌਣ ਗਾਵੇ ਜਿਨ੍ਹਾਂ ਨੇ ਸੰਤਿਪੰਨੀਆਂ ਵਿਦਿਆਈਆਂ ਨੇ ਚਾਰ ਸੰਗਤ ਪ੍ਰਾਪਤ ਕੀਤਾ ਹੈ। ਬ੍ਰਹਮ ਦੇਤਿਆਂ ਨੇ ਉਸ ਅਨੰਦ ਨੂੰ ਪ੍ਰਾਪਤ ਕੀਤਾ ਹੈ ਉਹ ਬ੍ਰਹਮ ਵਿਦਿਆ ਹੀ ਦੱਸ ਸਕਦੇ ਹਨ ਹੋਰ ਕੌਣ ਗਾਵੇ ਇਹ ਅਦਕਾਰੀ। ਕਾਇ ਸਾਜ ਕਰੇ ਤਨ ਤੇ। ਜਿਹਨੇ ਕੌਣ ਗਾਵੇ ਉਸ ਬੰਦੇ ਤਾਈਂ ਜਿਹਦਾ ਸਾਜਾ ਇਹ ਸਰੀਰ ਹੈ। ਜੇ ਕੋਈ ਮਿੱਥਿਆ ਕਰਕੇ ਨਿਸ਼ਚੈ ਕਰ ਲਵੇ ਉਹ ਬ੍ਰਹਮ ਗਿਆਨੀ ਨਹੀਂ ਦਾ ਸਕਦਾ ਹੈ ਦਾਵੇ ਤੋਹੀ ਲਾਹਰ ਦੇ ਜਿਹੜਾ ਮੀਤ ਭਾਗ ਨੂੰ ਲੈ ਕੇ ਫੇਰ ਦੇਵੇ ਮਾਨ ਤੋਂ ਰਹੇ ਤੋ ਬ੍ਰਹਮ ਦੇਵਤ ਕੌਣ ਦਾਵੇ ਜਿਹੜਾ ਗਿਆਨੀ ਜਾਤਾ ਦੂਰ ਜਿਹੜਾ ਜਤਨੇ ਬੁੱਧੀ ਕਰਕੇ ਸੰਕਲਪਾਂ ਕਰਕੇ ਅਗੇ ਦੇਖਣੇ ਦ੍ਰਿਸ਼ੀ ਕਰਕੇ ਜੇ ਗੁਰੂ ਮਾਨਤੋ ਹੋ ਜੇ ਉਹ ਬ੍ਰਹਮ ਜਾਨੀ ਬਣ ਸਕਦਾ ਹੈ ਗਾਵੇ ਕੋ ਦੇਖੇ ਹਾਦਰਾ ਹਦਿ ਜਿਹੜੇ ਬੁੱਝੇ ਜੀ ਕੌਣ ਗਾਏ ਬ੍ਰਹਮ ਜਾਨੀ ਹੋ ਹੀ ਸਕਦੇ ਹਨ ਕਥਨ ਕਥੀ ਕਹਿੰਦੇ ਗੁਰਸੇ ਕਥਨ ਕਥੀ ਸਾਹਿਬ ਨੇ ਕਰਕੇ ਨੇ ਮਾਇੰਨੇ ਇਹ ਕੰਡੇ ਕਾਰਾ ਸਿੰਘ ਜੀ ਨੇ ਆਪਣੇ ਕੀਰਤ ਵਿੱਚ ਕਹੇ ਹਨ ਕਸਮਾਂ ਕਥੀਆਂ ਆਵਾ ਕੇ ਇਹ ਭਾਈ ਕਸਮ ਕਰਨੇ ਆ ਕਸਮ ਨਹੀਂ ਕੀਤੀ ਜਾ ਸਕਦੀ ਕਾਠ ਕਾਠ ਕਥੀ ਤੋਤੀ ਤੋਟੇ ਉਸਾ ਕਰਨ ਵਾਲਿਆਂ ਨੇ ਕੁੱਥੀ ਹੋ ਕੇ ਕਹਤੇ ਹੋ ਕੇ ਕਸਮ ਕੀਤੀ ਹੈ ਕੋਤਾਨ ਜਨਮਾਂ ਵਿੱਚ ਕੋਤਾਨ ਕੋਤ ਦੇ ਕੋੜਾ ਰੂਪ ਤਾਂ ਆੜ ਕੇ ਫੇਰ ਵੀ ਉਹ ਵੀ ਕਹਾ ਲੋਕਾਂ ਨੂੰ ਆਉਂਦਾ ਬੰਤ ਹੈ ਦੇਦਾ ਦੇ ਲੈਂਦੇ ਠੱਪਾ ਇਹ ਮੇਰੇ ਸਰਵੀ ਦੀ ਭਾਈ ਦਾਤ ਤਾਂ ਗਈ ਜਾਂਦਾ ਜੁਦਾ ਹੈ ਉਹ ਲੈਣ ਵਾਲੇ ਜੀ ਜੰਤਨ ਨੂੰ ਉਹ ਸਾਰੇ ਫਤ ਪੈinde ਮਰ ਜਾਂਦੇ ਤ੍ਰੀਸ ਨਾਤ ਹੋ ਜਾਂਦੇ ਇਲਾਹੀ ਨਹੀਂ ਆਪਾ ਨਹੀਂ ਖੁੱਤ ਨਹੀਂ ਉਹ ਜਗ ਜਗਰ ਖਾਈ ਖਾਹ ਜਗ ਮਿਲਦੇ ਕਲ ਦੀ ਕੇ ਇਹ ਜੀਵ ਜਿਹੜੇ ਖਾਈ ਖਾਹ ਹੋ ਕੇ ਪਦਾਰਥਾਂ ਦੇ ਉਹ ਪਦਾਰਥਾਂ ਦੇ ਵਿੱਤਿਆਂ ਨੂੰ ਖਾਂਦੇ ਹੋਣਗੇ ਜੋ ਹੁਕਮੀ ਹੈ ਦਾਰੇ ਨੀ ਆਉਂਦੇ ਹੁਕਮ ਦੇ ਰਾਜ ਵਿੱਚ ਲੌਂਗਾ ਤੋਰਦਾ ਹੈ ਮਾਲਕ ਵਿੜਦਾ ਵੀ ਪਰਵਾਹ ਇਹ ਕੀ ਫੇਰ ਆਉਂਦੀ ਹੰਗ ਕੋਈ ਪੂਰਾ ਨਹੀਂ ਸੀ ਕੰਮ ਕਰ ਸਕਦਾ ਮਾਰਾ ਸਾਉ ਹੋਵੇ ਹਾਉ ਗਰੇ ਪਰਵਾ ਦੂਜੇ ਖਿੜਦਾ ਇਹ ਦੇਖੋ ਮੇਰੀ ਸੱਤਾ ਨਾਲ ਸਭ ਪੁੰਦਾ ਇਹ ਐਵੇਂ ਹੰਕਾਰ ਕਰਕੇ ਆਖੜੇ ਹੋ ਜਾਂਦੇ ਜੋ ਵੇਖ ਕੇ ਉਹ ਵੀ ਹਾਲਤ ਪ੍ਰਸੰਨ ਹੁੰਦਾ ਖਿੜਦਾ ਦੇਹੀ ਹੁੰਦਾ ਜਿਵੇਂ ਹੋਏ ਬੱਝੇ ਰਹੀਏ ਹਮੇਂ ਜੀਵ ਇਸ ਪ੍ਰਕਾਰ ਹੈ ਬੇਪਰਵਾਹ ਦੇ ਲੈਂਦੇ ਫਟਕਾ ਜੇ ਮਾਰੇ ਸਿੱਖਦੇ ਤਾਂ ਹੀ ਕੋਣ ਦੇਖ ਦੇ ਸਕਦਾ ਹੈ ਬ੍ਰਹਮ ਸੋਤਰੀ ਬ੍ਰਹਮ ਮੇਸਤੀ ਦੇ ਸਦਗਰੀ ਹੈ ਇਹ ਗੁਰ ਸਿੱਖੋ ਦੇ ਦਿੰਦੇ ਆ ਉਦੇਸ਼ ਨੂੰ ਉਹ ਬ੍ਰਹਮ ਗਿਆਨ ਨੂੰ ਦੱਸ ਦਿੰਦੇ ਆ ਪਰ ਲੈਣ ਵਾਲੇ ਜਿਹੜੇ ਅਧਕਾਰੀ ਹੈ ਫਟ ਕਹਿੰਦੇ ਜਿਹੜੇ ਸਰਨ ਤੇ ਯੋ ਜੈਮੇ ਮਾਰੇ ਮੇਟੇ ਜੀਵਨ ਤੇ ਮਰਿਆ ਧਰਮ ਦਾ ਖੰਖਜ ਕੇ ਹਾਰ ਚੁਕਾ ਹੈ ਇਸ ਸੱਚੇ ਪਾਤਸ਼ਾਹ ਨੇ ਖੰਖਜ ਕੇ ਆਪ ਦੀ ਕਰਨੀ ਚੀਆ ਇਹ ਲੈਣ ਆਏ ਦੇਖ ਜਿਹੜੇ ਜੀਵਨਾਂ ਦੀ ਭਗਤਾਂ ਉਹ ਖੰਖਜ ਸਾਰੇ ਸਹਿਬਾਨਾਂ ਵੱਲੋਂ ਪੱਤਕੇ ਜੀਵ ਸਾਜ ਦੇ ਕਰਨੀ ਪੈ ਜਾਂਦੇ ਹੋਣੇ ਛੱਡ ਕੇ ਕੋਈ ਸਰਬੀ ਬੰਦ ਜਿਆਦਾ ਗਰੇ ਦੇ ਬੰਦੇ ਹੰ ਬੱਸ ਲੈਂਦੇ ਆ ਲੈਣ ਵਾਲੇ ਜੰਮਣ ਮਰਨ ਤੋਂ ਰਹਿੱਤੇ ਜਾਂਦੇ ਆ ਕੋਈ ਜੰਮਣ ਮਰਨ ਕਿੰਨੀ ਆਉਂਦੇ ਹਨ ਜੁੱਗਾ ਅੰਦਰ ਬੰਦ ਗਿਆਨੀ ਖਾਹੀ ਜਿਹੜੀ ਖਾਸ ਹੈ ਨਾ ਦੁਨੀਆ ਦੇ ਪਦਾਰਥਾਂ ਦੀ ਇਹਨੂੰ ਉਹ ਖਾ ਜਾਂਦੇ ਆ ਦੁਨੀਆ ਦੀ ਖਾਸ ਨਹੀਂ ਉਹ ਰਹਿੰਦੀ ਇਹ ਜਿਹੜੀ ਖਾਸ ਹੈ ਨਾ ਦੁਨੀਆ ਦੀ ਖਾਈ ਜਾ ਰਹੀ ਹੈ ਖਾਈ ਜਾ ਰਹੀ ਹੈ ਉਹ ਗੁਰਮੁਖਾਂ ਦੀ ਦੁਨੀਆ ਦੀ ਖਾਸ਼ੀ ਖਾ ਲਿਆ ਨਾਸ਼ ਕਰ ਦਿੱਤਾ ਹੈ ਇਸ ਕਰਕੇ ਜਗਤ ਜੀ ਅੰਦਰ ਜਿਗਜਗ ਹੈ ਖਾ ਦੇ ਨਿਰਾਗ ਉਹ ਸਰਦੰਤੀ ਮੋਖਿੱਤ ਚਾਰ ਸਾਧਨ ਸੇ ਜਿਗਜਗ ਹੋਣਗੇ ਜਿਹੜਾ ਕਰਮ ਇਹਨਾਂ ਸਾਧਨਾਂ ਦੇ ਅੰਦਰ ਇਸਤ ਹੋ ਕਰਕੇ ਇਹ ਜਿਗਜਗ ਜੀਵ ਤੇ ਈਸ਼ਵਰ ਇਹਨਾਂ ਦੇ ਅੰਦਰ ਜਿਹੜਾ ਅੰਤਰਾ ਪੜਦਾ ਹੈ ਅਲੰਕਬ ਦਾ ਸਰਵੰਭ ਪਾਦਾ ਜੋ ਸੰਤਰੇ ਨੂੰ ਖਾਹਿ ਖਾਣ ਵਾਲੇ ਹੋ ਕੇ ਜਿਹਦੇ ਖਾ ਜਾਂਦੇ ਗਿਆਨवान ਨਾਸ ਕਰ ਦਿੰਦੇ ਹੈ ਉਹ ਬ੍ਰਹਮ ਆਨੰਦ ਦੇ ਤਾਈਂ ਜਗ ਦੀ ਏਕਤਾ ਪਾ ਕੇ ਸੁਰਖ ਪ੍ਰਕਿਰਤੀ ਦੀ ਏਕਤਾ ਪਾ ਕੇ ਇਸ ਜੁੜਿਆ ਹੋਇਆ ਹੈ ਉਹਨੇ ਖਾਣੇ ਜੋ ਦੇ ਪ੍ਰਕਾਰ ਸੀ ਖਾਣ ਵਾਲੇ ਹੋ ਕੇ ਕਾਪੇ ਕੇ ਉਸ ਆਨੰਦ ਨੂੰ ਖਾਏ ਕੇ ਅਨੰਦ ਮਾਣਦੇ ਹੈ ਕਦੇ ਨਖੁਰਦਾ ਨਹੀਂ ਆਨੰਦ ਹਰ ਵਕਤ ਉਸ ਆਨੰਦ ਕੀ ਲੀਨ ਰਹੇ ਹੰਨੇ ਉਹ ਕੋਈ ਹੁਕਮ ਚਲਾਇਰਾ ਜੇ ਮਹਾਰਜ ਜੇ ਬ੍ਰਹਮ ਗਿਆਨੀ ਆ ਉਹ ਕੋਈ ਕਰ ਜਰਦਾ ਕਿ ਨਹੀਂ ਕਹਿੰਦੇ ਹੁਣ ਪਾਈ ਇੱਕ ਕੰਮ ਕਰਦੇ ਆ ਵਾਹਿਗੁਰੂ ਦੇ ਹੁਕਮ ਨਹੀਂ ਸੀ ਜਨ ਕੇ ਆਪ ਆ ਆਪ ਆ ਗਿਆ ਚੰਦੇ ਹੁਕਮ ਦੇ ਰਾਜ ਚ ਲਾਉਂਦੇ ਜਿਹੜੇ ਹੁਕਮੀ ਸਤਜਨਾ ਦੇ ਹੁਕਮ ਦੁਆਰਾ ਰਾਜ ਬਣਾਏ ਉਹਨਾਂ ਦੀ ਗਿਆਨ ਵਿਆਨ ਇਸ ਸਰਕਾਰ ਸਰਵਨ ਮੰਨ ਨੂੰ ਵਿਅਸਣ ਆਜ ਕਰ ਉਹ ਸਰਾਵ ਦੀ ਕਾਟੇ ਨੂੰ ਸਰਨ ਵਿੱਚ ਉਹ ਬ੍ਰੰਧ ਵਿਆਹ ਦੇ ਨਾਲ ਨੂੰ ਲਾਉਣਾ ਕਰਦੇ ਕਿਸੇ ਪ੍ਰਕਾਰ ਦੇ ਕਾਇਲ ਨਹੀਂ ਹੁੰਦੇ ਉਹਨਾਂ ਜੀ ਜਾਂਦੇ ਉਹ ਬੇਪਰਵਾਹ ਹੁੰਦੇ ਹਨਗੇ ਕਿਸੇ ਪ੍ਰਕਾਰ ਉਹ ਜੀ ਹੁੰਦੇ ਕੱਟ ਵੇ ਤੇ ਨਹੀਂ ਉਹ ਕਿਸੇ ਸਾਹਮਣੇ ਕਿਸੇ ਜੀਵ ਜੀਵ ਦਾਸ਼ੀ ਦੇ ਮਖਾਜ ਨਹੀਂ ਹੁੰਦੇ ਸਦਾ ਸੁਤੰਤਰ ਹੁੰਦੇ ਆ ਤੇ ਆਪਣਾ ਤੇ ਆਨੰਦ ਦੇ ਸਾਥ ਹੁੰਦੇ ਆ ਜਿਹੜੇ ਵਿਕਾਰੀ ਉਹਨਾਂ ਦੇ ਹੁਕਮੀਆਂ ਦੇ ਹੁਕਮ ਵਿੱਚ ਆਪ ਨਹੀਂ ਚਲਾਉਂਦੇ ਆ ਉਹਨਾਂ ਦੇ ਇੰਗਰੇਜ਼ੀ ਹੁਕਮ ਚੱਲਦੇ ਆ ਨੌਨਾਰਿਕ ਵੀ ਸਾਰੇ ਬਾਦ ਚੱਲਦੇ ਪਰਮਾਰਸ਼ ਦੇ ਉਹ ਵੀ ਅਮੋੜ ਆ ਆਪਸੂ ਦੀ ਇਸ ਪ੍ਰਕਾਰ ਹਰਿਆ ਜੀ ਹੋਇ ਕਿਥੇ ਹਰਿਆਏ ਪਸੂ ਆਇਓ ਨੀ ਉਹਨੇ ਕੋਈ ਮੋੜ ਹੋ ਕੇ ਵਰਦੇ ਉਹ ਜਿਹੜੇ ਹਕਮੀ ਬਣ ਕੇ ਆ ਇੰਦਰੀਏ ਮਾਨਵੀ ਵਿਗਿਆਸੀ ਸਾਰੇ ਉਹ ਆ ਚੰਦੇ ਆ ਉਹ ਬੇਪਰਵਾਹ ਰੂਪ ਨੂੰ ਪਾ ਕੇ ਉਹਦੇ ਵਿਦਿਆ ਪ੍ਰਸੰਨ ਹੁੰਦੇ ਆ ਉਹ ਸਭ ਦੇ ਨਾਮਲੇ ਨੂੰ ਜੀਵੀ ਕੌੜੀ ਦੇਣ ਵਿਗਿਆਸੀ ਲੰਗਦਾ ਕਾਰਨ ਕੀਤੀ ਸ੍ਰੀ ਰਾਮ ਜੀ ਜੈ ਜੈਕਾਰ ਹੋਵੇ ਸੋਨੂੰ ਕੁਦਿਸਤਾਨ ਰਹਿਤ ਬੋਧ